ਗਵਰਨਮੈਂਟ ਵੱਲੋਂ ਜਿਲ੍ਹਾ ਲੁਧਿਆਣਾ ਤੇ ਪਿੰਡ ਬਿਸ਼ਨਪੁਰੇ ਦਾ ਸਰਦਾਰ ਮੰਗਲ ਸਿੰਘ ਡਾਇਰੀ ਲਿਖ ਕੇ ਦਿੰਦਾ ਸੀ ਅੰਗਰੇਜ਼ਾਂ ਨੂੰ ਕਿ ਇਹ ਕਰਦੇ ਨੇ ਇਸ ਤਰ੍ਹਾਂ ਹੁੰਦਾ ਹੈ ਇਸ ਤਰ੍ਹਾਂ ਹੁੰਦਾ ਹੈ ਇਹ ਸਤਿਗੁਰੂ ਰਾਮ ਸਿੰਘ ਜੀ ਦੇ ਦੀਵਾਨਾ ਵਿੱਚ ਡਾਇਰੀ ਦਿੰਦਾ ਸੀ ਇਹ ਡਾਇਰੀ ਦਿੰਦਾ ਸੀ ਭਈ ਇਸ ਤਰ੍ਹਾਂ ਹੋ ਰਿਹਾ ਇਹਨੂੰ ਪਤਾ ਲੱਗਾ ਕਿ ਕੂਕੇ ਕੰਦ ਵਿੱਚ ਕੋਈ ਕਲਾਮ ਦਿੰਦੇ ਇਹ ਤੇ ਸਜਦਾਣੀ ਕਲਾਮ ਹੈ ਨਾਮ ਨਹੀਂ ਹੈ ਲੋਕਾਂ ਨੇ ਧਮਾਇਆ ਇਨੂੰ ਹੁਕਮ ਆਇਆ ਵੀ ਪਤਾ ਲਾਓ ਇਹ ਕਰਦੇ ਕੀ ਨੇ ਕੰਨ ਵਿੱਚ ਕੀ ਕਹਿੰਦੇ ਨੇ ਇਸ ਨੇ ਪਤਾ ਕਰਨਾ ਚਾਹਿਆ ਆਪਣੇ ਕਈ ਨਾਲ ਨੌਕਰ ਭੇਜੇ ਫੇ ਜਾ ਕੇ ਪੁੱਛ ਕੇ ਵੇਖੋ ਕੀ ਕਹਿੰਦੇ ਨੇ ਕੰਨ ਵਿੱਚ ਜਦੋਂ ਜਾ ਕੇ ਉਹ ਭਜਨ ਪੁੱਛਦੇ ਉਹ ਦੱਸਣ ਜੋਗੇ ਰਹਿੰਦੇ ਹੀ ਨਹੀਂ ਸਨ ਆਣ ਕੇ ਦੱਸਦੇ ਨਹੀਂ ਸਨ ਐਸਾ ਹੋ ਜਾਂਦਾ ਸੀ ਐਸਾ ਹੋਇਆ ਫਿਰ ਉਹਨਾਂ ਸੋਚਿਆ ਵੀ ਚਲੋ ਆਪ ਚੱਲ ਕੇ ਪ੍ਰੇਖਾ ਕੱਢ ਲੈਨੇ ਆ ਸਰਦਾਰ ਮੰਗਲ ਸਿੰਘ ਸਤਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਕਰਨ ਵਾਸਤੇ ਪੰਡਾਲ ਵਿੱਚ ਪਹੁੰਚਿਆ ਜਾ ਕੇ ਜਿਸ ਤਰ੍ਹਾਂ ਤਰਤੀਬ ਲੱਗੀ ਹੋਈ ਸੀ ਮੱਥਾ ਟੇਕਣ ਵਾਲਿਆਂ ਦੀ ਨਾਲ ਚੱਲ ਪਿਆ ਜਿਸ ਵੇਲੇ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਸਾਹਮਣੇ ਜਾ ਕੇ ਪ੍ਰਤੱਖ ਦਰਸ਼ਨ ਕੀਤਾ ਐਸਾ ਦਰਸ਼ਨ ਤੇ ਦਰਸ਼ਨ ਕਰਦਿਆਂ ਮਨ ਦੇ ਭਲੇਖੇ ਤੇ ਭਰਮ ਦੂਰ ਹੋ ਗਏ ਠੰਡ ਪੈ ਗਈ ਸੋਚਿਆ ਮਨਾ ਕੈਸੀ ਸ਼ਾਂਤ ਮੂਰਤ ਹੈ ਕੈਸਾ ਜਲਵਾ ਪਿਆਰਾ ਹੈ ਅੱਖੀਂ ਠੰਡ ਪੈਂਦੀ ਹੈ ਕੈਸਾ ਸੁੰਦਰ ਦਿਦਾਰਾ ਹੈ ਸਤਿਗੁਰਾਂ ਦਾ ਦਰਸ਼ਨ ਤੋਂ ਪ੍ਰਭਾਵਿਤ ਹੋਇਆ ਤੇ ਬੋਲ ਨਾ ਸਕਿਆ ਨਮਸਕਾਰ ਕਰਨੀ ਪੈ ਗਈ ਨਾਲ ਸਾਰਿਆਂ ਦੇ ਜਿਸ ਵੇਲੇ ਨਮਸਕਾਰ ਕਰਕੇ ਉੱਠਿਆ ਤੇ ਸਤਿਗੁਰਾਂ ਦੀ ਮਿਹਰ ਦੀ ਨਜ਼ਰ ਪਈ ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹੇ ਬਚਨ ਕੀਤਾ ਮੰਗਲ ਸਿਆ ਇਹ ਭਜਨ ਪੁੱਛ ਲੈ ਤੇਰਾ ਭਰਮ ਦੂਰ ਹੋ ਜਾਏ ਤੈਨੂੰ ਪਤਾ ਲੱਗੇ ਇਹ ਕਲਾਮ ਹੈ ਕਿ ਗੁਰੂ ਨਾਨਕ ਦਾ ਬਣਾਇਆ ਹੋਇਆ ਨਾਮ ਹੈ ਤੇਰਾ ਭਲੇ ਖਾਤੇ ਨਿਕਲ ਜਾਏ ਨਾ ਫਿਰ ਨਾ ਨਾ ਕਰ ਸਕਿਆ ਭਜਨ ਪੁੱਛ ਲਿਆ ਜਿਸ ਵੇਲੇ ਸਤਗੁਰਾਂ ਨੇ ਕੰਨ ਵਿੱਚ ਨਾਮ ਦੀ ਫੂਕ ਮਾਰੀ ਨਾਮ ਦੇ ਦਿੱਤਾ ਤੇ ਹੋਇਆ ਕੀ ਮਨੇ ਪ੍ਰਕਾਸ਼ ਭਇਓ ਪਰਮਦਾਸਿਓ ਮੰਤਰ ਦੀਓ ਗੁਰ ਕਾਨ ਪਤਾ ਲੱਗਦਾ ਕਿ ਗੁਰਬਾਣੀ ਵਿੱਚ ਜਿਹੜੀ ਇਹ ਗੱਲ ਆਈ ਹੈ ਗੁਰੂ ਘਰ ਦੇ ਵਿੱਚ ਪੁਰਾਣੇ ਜ਼ਮਾਨੇ ਤੋਂ ਲੈ ਕੇ ਗੁਰ ਮੰਤਰ ਨੂੰ ਕੰਨ ਵਿੱਚ ਦਿੱਤਾ ਜਾਂਦਾ ਸੀ ਇਹ ਪੰਕਤੀ ਆਈ ਹੈ ਗੁਰਬਾਣੀ ਵਿੱਚ ਮੰਤਰ ਜਿਓ ਗੁਰ ਕਾਣ ਭਾਵ ਕੰਨ ਵਿੱਚ ਮੰਤਰ ਦਿੱਤਾ ਮੰਤਰ ਦਿੱਤਾ ਤੇ ਗੁਰ ਮੰਤਰ ਦਿੱਤਾ ਕੰਨ ਵਿੱਚ ਤੇ ਇਹ ਬਿਹਾਲ ਹੋ ਗਿਆ ਮਸ਼ਟਭਿਰਤੀ ਹੋ ਗਈ ਕਾਇਆ ਪੱਟ ਦਿੱਤੀ ਮਨ ਨਰਮਲ ਹੋ ਗਿਆ ਤੇ ਮੰਗਲ ਸਿੰਘ ਹੋਰ ਦਾ ਹੋਰ ਹੋ ਗਿਆ ਮੰਗਲ ਸਿੰਘ ਉਹ ਨਾਰਿਆ ਜਿਹੜਾ ਬਣ ਕੇ ਆਇਆ ਸੀ ਕਿਸੇ ਨੇ ਪੁੱਛਿਆ ਮੰਗਲ ਸਿੰਘਾ ਕੀ ਹੋਇਆ ਤੈਨੂੰ ਹੁਣ ਉੱਠ ਕੇ ਪੰਡਾਲ ਵਿੱਚ ਸਤਿਗੁਰੂ ਰਾਮ ਸਿੰਘ ਪਾਤਸ਼ਾਹ ਨੂੰ ਮੁਖਾਤਬ ਕਰਕੇ ਕਹਿੰਦਾ ਮੇਰੇ ਨਾਲ ਆ ਕੁਛ ਹੋਇਆ ਏ ਜੀਤੀਵਾਨਾ ਹੋ ਗਿਆ ਕਰਕੇ ਤੇਰਾ ਮੈਂ ਦੀਵਾਨਾ ਹੋ ਗਿਆ ਮੈਂ ਦੀਵਾਨਾ ਮੈਂ ਦੀਵਾਨਾ ਹੋ ਗਿਆ ਕਰਕੇ ਜੀ ਤੇਰਾ ਦੀਦਾਰ ਮੈਂ دیਵਾਨਾ ਹੋ ਗਿਆ ਕਰਕੇ ਤੇਰਾ ਦੀਦਾਰ ਮੈਂ دیਵਾਨਾ ਹੋ ਗਿਆ ਮੈਂ دیਵਾਨਾ ਹੋ ਗਿਆ ਮੈਂ دیਵਾਨਾ ਹੋ ਗਿਆ ਕਰਕੇ ਤੇਰਾ ਇਹ ਲਤੀਦਾਰ ਦੀਵੰਦਾ